ਸ਼ਲੋਕ ਮਹੱਲਾ ਚੋਥਾ, ਮਨ ਅੰਤਰ ਹੋਮੈ ਰੋਗ ਹੈ ਰੰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵੰਜਾਏ ਮਿਲ ਸਤਗੁਰ ਸਾਧੂ ਸੱਜਣਾ ਹਾਂਜੀ ਮਨ ਅੰਤਰ ਹੋਮੈ ਰੋਗ ਹੈ ਮਨ ਦੇ ਅੰਦਰ ਹੋਮੈ ਰੋਗ ਹੈ ਤਾਂ ਪਤਾ ਹੀ ਹੈ ਸਭ ਨੂੰ ਪਤਾ ਘਰ-ਵਾਰ ਆਈ ਹੋਈ ਏ ਗੱਲ ਪ੍ਰਭ ਭੂਲੇ ਮਨ ਮੁਖ ਦੁਰਜਨਾ ਪਰਮ ਦੇ ਵਿੱਚ ਪੁਰਲੇ ਗੌਰ ਜਿਹੜੇ ਹੋਏ ਨੇ ਉਹ ਮਨਮੁਖ ਨੇ ਔਰ ਦੁਰਜਨ ਨੇ ਚੰਗੇ ਇੱਕ ਜਾਨਵਰ ਦਾ ਇੱਕ ਦੁਰਜਾਨਵਰ ਦਾ ਜਿਹੜੇ ਜਾਂ ਬੇ ਹੋ ਬੇੜੇ ਦਾ ਮਤਲਬ ਹੈ ਗਿਆਨਵੰਤ ਹੈਗੇ ਨੇ ਉਹ ਪਰ ਉਲਟੇ ਗਿਆਨ ਚ ਲੱਗੇ ਹੋਏ ਨੇ ਜਾਣ ਬੁੱਝ ਗਏ ਬੁਨਾਏ ਬਣੀ ਬੁੱਝਦੇ ਜਿਹੜੇ ਬੁਨਾਏ ਨਹੀਂ ਬੁੱਝਦੇ ਦੁਰਜਾਨਵਰ ਇੱਕ ਮਨਮੁਖ ਹੁੰਦਾ ਇੱਕ ਦੁਰਜਾਨਵਰ ਮਨਮੁਖ ਤਾਂ ਹੁੰਦਾ ਜੋ ਪਤਾ ਨਹੀਂ ਹੈ ਉਹਨੂੰ ਦੁਰਜਨ ਉਹ ਬਈ ਨਹੀਂ ਮੰਨਣਾ ਹੈ ਨਾਨਕ ਰੋਗ ਵੰਜਾਏ ਮਿਲ ਸਤਿਗੁਰ ਸਾਧੂ ਸੱਜਣਾ ਸਤਿਗੁਰ ਜਿਹੜੇ ਸਾਧੂ ਸੱਜਣ ਨੇ ਨੂੰ ਮਿਲ ਕੇ ਜਿਹੜਾ ਸਤਿਗੁਰਾ ਉਹੀ ਸਾਧੂ ਆ ਉਹੀ ਸੱਜਣ ਜੇ ਤਾਂ ਨੇ ਸਾਧੂ ਜਿਹੜਾ ਗਿਆਨ ਨਹੀਂ ਕਰਾ ਸਕਦਾ ਸੱਚ ਦਾ ਉਹ ਸਾਧੂ ਨਹੀਂ ਗਿਆਨ ਦੀ ਕਰਾ ਸਕਦਾ ਸਾਧੂ ਕਹੋਂਦਾ ਉਹ ਸੱਜਣ ਬਣਦੀ ਕਿਸੇ ਦਾ ਉਹ ਤਾਂ ਮਾਇਆਦਾਰੀ ਹੈ ਰੋਗ ਜੇ ਜੋ ਰੋ ਨਾ ਕੋ ਬੇੜਾ ਇਹ ਸਤਗੁਰ ਕੋਈ ਮਿਲੂਗਾ ਉਹ ਉਹਦੇ ਅੰਦਰ ਉਹ ਆਪ ਨਹੀਂ ਰੋਗੀ ਹੁੰਦਾ ਰੋਗ ਹੋਈ ਪਾਉਂਦੀ ਹੈ ਆਪਣਾ ਕੋਲਿਆ ਉਹ ਕਿਸੇ ਦਾ ਗਵਾ ਸਕਦਾ ਸਤਗੁਰ ਸਾਧੂ ਸੱਚੇ ਰੂਪ ਨੇ ਕਿ ਕਿਸੇ ਨੂੰ ਰੋਗ ਗਵਾਇਆ ਜਾ ਸਕਦਾ ਹੈ ਹੋਵੇ ਕੋਈ ਆਪਣੇ ਅੰਦਰ ਇਹਨੂੰ ਵੀ ਮਿਲ ਗਵਾਇਆ ਜਾ ਸਕਦਾ ਜੀ ਆਖਰ ਤਾਂ ਇਹਦੇ ਨਾਲੇ ਮਿਲ ਕੇ ਵੇਖੋ ਜਿੰਨਾ ਚਿਰ ਇਹਦੇ ਨਾਲ ਨਹੀਂ ਮਿਲਦੇ ਗੱਲੇ ਨਹੀਂ ਸਮਝ ਆਉਣੀ ਬਹਾਲੇ ਸਤਗੁਰ ਦੀ ਗੱਲ ਗੁਰਦੇਵ ਦੀ ਗੱਲ ਗੁਰਬਾਣੀ ਦੀ ਗੱਲ ਵੀ ਅੰਦਰ ਵਿਚਾਰ ਕਰੀ ਸਮਝ ਆਉਣੀ ਹੈ ਪੜ ਕੇ ਦੀ ਸੋਚ ਆਉਣੀ ਹੈ ਵਿਚਾਰ ਕੇ ਸਭ ਨੂੰ ਚੋੜੀ ਵਿਚਾਰਨ ਦੀ ਲੋੜ ਹੈ ਮਹੱਲਾ ਚੌਥਾ ਮਨ ਤਨ ਤਾਮ ਸਗਾਰਵਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹੁਣ ਜੀਵਾ ਸੱਦ ਸੁਣੇ ਤਨ ਤਾਮ ਤਾਮ ਸ਼ਬਦ ਅਸਲ ਤਾਮ ਦੀ ਫਿਰ ਰਹੇ ਹੈ ਅੱਛਾ ਜੀ ਇਹ ਤਾਮ ਸ਼ਬਦ ਆਉਂ ਫਿਰ ਅੱਛਾ ਕਾਰਵਾ ਲੱਗਾ ਕੌਣਸਾ ਲੱਗਾ ਇਹ ਸਭੋਂ ਕਾਰਵਾ ਲੱਗਾ ਇਹਨੂੰ ਗਾਣਾ ਕਬਸ ਨੂੰ ਤਾਮਸ ਕਹਿੰਦੇ ਨੇ ਤਾਮ ਸਿਆਰੀ ਨਾਲ ਹੈ ਹੀ ਲੱਗਿਆ ਹੋਇਆ ਨਹੀਂ ਇਹਨਾਂ ਨੇ ਤਾਮ ਸਿਆਰੀ ਨਾਲ ਲਿਖਿਆ ਹੋਇਆ ਹੈ ਤਾਂਵੇਂ ਹੋਊਗਾ ਫਿਰ ਕਿਉਂਕਿ ਤਾਮਸ ਤਾਂ ਬਿਨਾਂ ਸਿਆਰੀ ਤੋਂ ਲਿਖਦੇ ਆ ਸੱਸੇ ਤੇ ਸਿਆਰੀ ਤਾਂ ਆਉਂਦੀ ਇਥੇ ਕਿੱਥੇ ਲਿਖਦੇ ਨੇ ਤਾਮਸ ਆਇਆ ਹੋਇਆ ਸਿਹਾਰੀ ਨਾਲ ਵੀ ਆਇਆ ਔਂਕੜ ਨਾਲ ਵੀ ਆਇਆ ਤਾਮਸ ਹਾਂ ਕਈ ਕੋਟ ਰਾਜਸਤਾਨਸwidehatk 1.9 ਸਾਹਿਬ ਚਾਹੁੰਦਾ ਵਾਹ ਹਾਂ ਤਾਮਸ ਆਉਂਦਾ ਉੱਥੇ ਠੀਕ ਹੈ ਨੂੰ ਸਿਹਾਰੀ ਨਹੀਂ ਹੈ ਤੇ ਹੋਰ ਕਾਹ ਹੋਇਆ ਸਸੇ ਨੂੰ ਆ ਸਸੇ ਨੂੰ ਨਾ ਫਿਰ ਗਾਰਬਾ ਨਹੀਂ ਬਣਦਾ ਤਾਮ ਨੂੰ ਗਾਰਬਾ ਨਾਲ ਲੱਗਣਾ ਹਾਂ ਠੀਕ ਹੈ ਸਕਾਰਵਾ ਕਿਹਤਾਰਵਾ ਵੱਢ ਲਾਂਗੇ ਫਿਰ ਇਹਨੂੰ ਇਹ ਸ਼ਕਾਰਵਾ ਬਣ ਜਾਊਗਾ ਫਿਰ ਟਿੱਪੀ ਤਾਂ ਹੁੰਦੀ ਨਹੀਂ ਕੋਈ ਸ਼ਕਾਰਵਾ ਕਹੇ ਦੋ ਇਹਨੂੰ ਫਿਰ ਸਕਾਰਵਾ ਇਹਨਾਂ ਲਿਖਿਆ ਹੋਇਆ ਇਹ ਇੱਥੇ ਹੀ ਆ ਮੈਨੂੰ ਲੱਗਦਾ ਹੋਰ ਕਿਤੇ ਸਕਾਰਵਾ ਨਹੀਂ ਆਉਂਦਾ ਹੋ ਸਕਦਾ ਫਿਰ ਇਹ ਗਲਤ ਹੈ ਮੰਨੋ ਤਾਂ ਖਤਮ ਕਰ ਦੇਣ ਨਸ਼ਟ ਕਰ ਦੇਣ ਉਹ ਜਦੋਂ ਆਉਂਦਾ ਨਾ ਪਰਦੇਸੀ ਕੇ ਕਾਗਰੇ ਚਾਹੁੰਦੇਸ ਲੱਗੇ ਆਗ ਫਿਰ ਕਾ ਜਲ ਕੋਇ ਪਈ ਤਾਗੇ ਅੰਜਨਾ ਲਾਗ ਉਹਦੀ ਇਹ ਪਲਟ ਹੈ ਅੱਛਾ ਫਿਰ ਸਹੀ ਹੋਏਗਾ ਪਾਠ ਮਨ ਤਨ ਤਾਮਸ ਗਾਰਵਾ ਜਾ ਦੇਖਾ ਹਰ ਨੈਣੇ ਨੈਣਾ ਦੇ ਮਹਲ ਦਰਸ਼ਨ ਹੋਇਆ ਮਨ ਵਿੱਚੋਂ আর ਮਿਰਦੇ ਵਿੱਚੋਂ ਤਾਮਸ ਜਿਹੜੀ ਸੀ ਇਹ ਤ੍ਰਿਸ਼ਣ ਦੀ ਸੱਧ ਸੁਣੇ ਹਾਂ ਨਾਨਕ ਸੋ ਪ੍ਰਭ ਮੈ ਮਿਲਣਾ ਉਹ ਮੈਨੂੰ ਪ੍ਰਭ ਮਿਲਣਾ ਚਾਹੀਦਾ ਹਉ ਜੀਵਾਂ ਸੱਧ ਸੁਣੇ ਜਿਹਦੇ ਨਾਲ ਜੀਵਨ ਹੋ ਜਾ ਜਿਹਦਾ ਬਚਨ ਸੁਣ ਕੇ ਮੈਨੂੰ ਜਿਹਦੇ ਬਚਨ ਸੁਣ ਨਾਲ ਮੇਰਾ ਜੀਵਨ ਹੋ ਜਾ ਐਸਾ ਮੈਨੂੰ ਬਣਨਾ ਚਾਹੀਦਾ ਸਤਿਗੁਰ ਨਾਨਕ ਸੋ ਪ੍ਰਭ ਮੈਂ ਮਿਲੈ ਮਿਲੈ ਦਾ ਮਤਲਬ ਮਿਲਣਾ ਚਾਹੀਦਾ ਕਿ ਮਿਲ ਚੁੱਕਿਆ ਜੀ ਮਿਲਣਾ ਚਾਹੀਦਾ ਹੀ ਆਊਗਾ ਉਹ ਫੇ ਮਿਲਿਆ ਆਉਂਦਾ ਵੇਲੇ ਆ ਜਾਂਦਾ ਮਿਲ ਚੁੱਕਿਆ ਮੈਂ ਦਾ ਮਤਲਬ ਹੈਗਾ ਮਨ ਨੂੰ ਜੇ ਇਸ ਤਰ੍ਹਾਂ ਲੋਭ ਨੂੰ ਵਹਿਲੂ ਵਹਿਲੂ ਮਹਿਰ ਵਹਿਲੂ ਜੇ ਮਿਲੂ ਮਿਲੈ ਅੱਛਾ ਜੀਵਾਂ ਸੱਦ ਸੁਣੇ ਹਾਂ ਉਹ ਪਰ ਮਿਲੂ ਬਹਿਣਾ ਚਾਹੀਦਾ ਜਿਹਦੇ ਨਾਲ ਸਾਜੀਵਲ ਹੋ ਜਾਵੇ ਜਿਹਦੇ ਬਚਨ ਸੁਣ ਕੇ ਜਿਹਦਾ ਉਪਦੇਸ਼ ਸੁਣ ਕੇ ਸਾਜੀਵਲ ਹੋ ਜਾ ਉਚਾਰਨ ਕਰਨ ਵਾਲਾ ਗੁਰਬਾਣੀ ਨੂੰ ਸਮਝਣ ਵਾਲਾ ਗੁਰਬਾਣੀ ਨੂੰ ਸਮਝਾਉਣ ਵਾਲਾ ਗੁਰ ਜੀ ਬਈ ਜੋ ਉਚਾਰਨ ਕਰਨ ਵਾਲਾ ਆਪਾਂ ਕੱਲਾ ਬੋਲ ਲਈਏ ਫਿਰ ਛੇਵੇਂ ਪਾਤਸ਼ਾਹ ਸੱਤਵੇਂ 락ਸ਼ਮੀ ਪਾਤਸ਼ਾਹ ਤੇ ਉਹ ਗੱਲ ਨਹੀਂ ਕੀਤੀ ਵਾਲੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰ ਨਾਮ ਧਿਆਵੋ ਮੇਰੇ ਗੁਰ ਹਰ ਊਤਮ ਹਰ ਨਾਮ ਅਮੋਲ ਜਗਨਨਾਥ ਜਗਦਰ ਦਾ ਨਾਮ ਹੈ ਜਿਹੜਾ ਜਿਹੜਾ ਜਗਤ ਨੂੰ ਆਪਣਾ ਕਾਬੂ ਚ ਕੀਤਾ ਹੋਇਆ ਹੈ ਸ਼੍ਰੀ ਜਗਦੀਸ਼ਰ ਜਗਦਦਾਈਸ਼ਵਰ ਹੈ ਜਿਹੜਾ ਕਰਤੇ ਅਪਰੰਪਰ ਪੁਰਖ ਅਤੋਲ ਹੈ ਪਰ ਪੁਰਖ ਹੈ ਜੋਤ ਕਰਕੇ ਪੂਰਾ ਕਰਨ ਵਾਲਾ ਪੁਰਖ ਉਹ ਪੁਰਖ ਹਰ ਨਾਮ ਤੇ ਆਵਾਂ ਮੇਰੇ ਗੁਰ ਸਿੱਖੋ ਹਰ ਨਾਮ ਤੇ ਆਵੋ ਮੇਰੇ ਨਾਲ ਗੁਰ ਸਿੱਖੋ ਹਰ ਉਤਮ ਹਰ ਨਾਮ ਅਮੋਲੇ। ਮੇਰੇ ਗੁਰ ਸਿੱਖੋ ਕੋ ਕੋ ਬੇਰੇ ਸਿੱਖੋ ਨਹੀਂ ਮੇਰੇ ਗੁਰ ਸਿੱਖੋ ਗੁਰ ਸਿੱਖੋ ਮੇਰੇ ਤੇ ਨਾਲ ਗੁਰ ਹੈ ਗੁਰ ਸਿੱਖੋ ਸਿੱਖਣਾ ਉਹਦੇ ਅੰਦਰ ਜਿਹੜਾ ਗੁਰ ਹੈ ਉਹਦੇ ਹੀ ਨੇ ਪਰ ਮੇਰਾ ਵੀ ਗੁਰ ਉਹੀ ਹੈ ਕਿਉਂਕਿ ਮੇਰੇ ਗੁਰ ਸਿੱਖੋ ਹਰ ਨਾਮ ਤੇ ਆਵੋ ਮੇਰੇ ਹਰ ਗੁਰ ਮੇਰੇ ਗੁਰ ਸਿੱਖੋ ਹਰ ਉਤਮ ਹਰ ਨਾਮ ਸੁਮੋਲੇ। ਹਰ ਜਿਹੜਾ ਉਤਮ ਹੈ ਔਰ ਉਹਦਾ ਨਾਮ ਨਾਮ ਬੋਲੇ ਹਰ ਉਤਮ ਕੁਚਿਤਮ ਸਭ ਤੋਂ ਪਰਉ ਉਹ ਤੋਂ ਥੱਲੇ ਹੀ ਨੇ ਬਾਕੀ ਸਭ ਹੋਜੀ ਜਿੰਨ ਤੇ ਆਇਆ ਛਿਰਦੇ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੇ ਗੁਰ ਸਤਗੁਰ ਪੂਰਾ ਬੋਲੇ ਜਿਨ੍ਹਾਂ ਨੇ ਹਿਰਦੇ ਚਿੱਤੇ ਹੰਤੜ ਲਿਆ ਆਪਣੇ ਜਿਨ੍ਹਾਂ ਦਾ ਧਿਆਨ ਹਿਰਦੇ 'ਚ ਟਿਕ ਗਿਆ ਦਿਨ ਸਰ ਦਿਨ ਰਾਤ ਲਗਾਤਾਰ ਟਿਕਿਆ ਹੀ ਰਿਹਾ ਤੇ ਮਿਲੇ ਨਹੀਂ ਆ ਲੋੜ ਤੇ ਮਿਲੇ ਤੇ ਫਿਰ ਕੋ ਮਲਾਵਾ ਨਹੀਂ ਨਹੀਂ ਆ ਲੋੜ ਉਹਨਾਂ ਦਾ ਹੱਲ ਹੀ ਰੁੜਿਆ ਉਹਨਾਂ ਨੇ ਹੱਲ ਲੱਭ ਲਿਆ ਨਹੀਂ ਰੁੜ ਗਿਆ ਹਰ ਹਰ ਬਾਹਰੇ ਬਣਾ ਲਿਆ ਅੰਦਰੋਂ ਵਿੜਿਆ ਨਹੀਂ ਬਾਹਰ ਬਣ ਲਿਆ ਉਹ ਟੋਲਿਆ ਹੀ ਨਹੀਂ ਅਸਲ ਚਿਰ ਤੋਂ ਜੁੜੇ ਹੀ ਦੀ ਬੜ ਭਾਗੀ ਸਤ ਸੰਗਤ ਮਿਲਿਆ ਐਸੀ ਸਤ ਸੰਗਤ ਹਰ ਦਿਨ ਨਾਲ ਅੰਦਰ ਲਈ ਬੜੇ ਭਾਗ ਭਾਗਾਂ ਨਾਲ ਰਹਿੰਦੀ ਹੈ ਗੁਰ ਸਤਗੁਰ ਪੂਰਾ ਬੋਲ ਔਰ ਗੁਰ ਸਤਗੁਰ ਦੇ ਇਹਨੇ ਬੋਲ ਨੇ ਪੂਰੇ ਹੋ ਗਏ ਵੀ ਭਾਈ ਉਦਰੇ ਗਲੂ ਬਾਹਰ ਮਿਲਣਾ ਨਹੀਂ ਔਰ ਉਹ ਸੰਗਤ ਸਫਲ ਹੈ ਗੁਰ ਕੀ ਸੇਵਾ ਜਿਹੜੀ ਸਫਲ ਹੈ ਜੇ ਕਰੇ ਜਿੱਤ ਲਾਏ ਹੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜੰਮ ਝਗੜ ਛਗੋਲ ਦੇਖੋ ਸਭ ਤੇ ਆਵੋ ਨਰ ਇੱਕ ਪੈਰ ਕੋ ਆਵੋ ਨਾਰਾਇਣੋ ਨੂੰ ਤੇ ਆਵੋ ਨਾਰੈਣ ਕਿਹਤੈਨ ਦੇਖੋ ਕੌਣ ਹੈ ਨਾਰੈਣ ਅੱਦਲਾ ਹੈਗਾ ਕਿਰਤਾ ਤੇ ਨਾਰਮਣ ਇੱਥੇ ਨਾਲ ਨਾਰੈਣ ਦਾ ਅਵਤਾਰ ਵੀ ਲਿਖਿਆ 24 ਅਵਤਾਰਾਂ ਦੇਖੋ ਮਨ ਕਿਰਤੀ ਇਕੱਠਾ ਹੋਣਾ ਹੀ ਕੋ ਹੈ ਤਉ ਉਹ ਨਾਰਾ ਨਾਰਾਇਣ ਕੇ ਹੈ ਉੱਥੇ ਜਿਹੜਾ ਸ਼ਰੀਰ ਨਾਲ ਜੁੜਿਆ ਹੋਇਆ ਨਾਰਾ। 110 ਰੁਪਏ ਨਾਲ ਆਣ ਕਹਿੰਦੇ ਨੇ। ਹਾਂ ਸਭ ਧਾਵੋ ਨਾਲ ਨਾਰਾਣੋ ਨਾਰਾਣੋ ਜਿੱਤ ਚੂਕਾ ਜਾਮਾ ਕਿ ਅਗੜਿਤ ਕੋਲ ਉਹ ਜਿਹੜਾ ਨਾਰਾਣੋ ਉਹਦਾ ਜਮ ਨਾਲ ਨਹੀਂ ਕੋਈ ਸੰਬੰਧ ਹੈ। ਉਹ ਪਰਬਤੋਂ ਦੂਰ ਹੈ। ਸਤਿਗੋਦ ਤੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਨਾਸ਼ੀਪੁਰਖ ਹੈ ਸਾਹਮਣੇ ਰਿਹਾ ਸਮਾਏ ਉਹ ਅਵਨਾਸ਼ੀ ਹੈ। ਉਹ ਉਹ ਜਗਦਾਵਨ ਦਾਰੀ ਹੈ। ਹੋਜੀ। ਤੁਹੇ ਕਿ ਪਹਿਲਾ ਨਰ ਨਾਰਾਇਣ ਉਹਦਾ ਕੀ ਭਾਵ ਹੈ ਵੀ ਨਾਰਾਇਣ ਨਰ ਮਿਲ ਕੇ ਇੱਕ ਹੋਏ ਆ ਨਹੀਂ ਨਹੀਂ ਨਾਲੂ ਕਹੇ ਤੇ ਆਵੋ ਕਿਨੂੰ ਤੇ ਆਵੋ ਨਾਰਾਇਣ ਨਾਰਾਇਣ ਨੂੰ ਜੋੜ ਇੱਕ ਜੜੇ ਹੋ ਜਾਣਗੇ ਫਿਰ ਜੇ ਨਾਰਾਇਣ ਨਾਰਾਇਣ ਉਹੀ ਹੈ ਸਿਰਫ ਜੋਰ ਦਾ ਤਾ ਉਸ ਨਾਰਾਇਣ ਉਤੇ ਨਾਲ ਨਾਰਾਇਣ ਕੋਗੇ ਧਿਆਨ ਧਿਆਨ ਵਾਲੇ ਕੋਣ ਨਾਰਾਇਣ ਉਹਨਾਂ ਦਾ ਧਿਆਨ ਦੀ ਫਰਮਾਇਆ ਬਲ ਧਿਆਨ ਹੈ ਜੇ ਆਪਣੇ ਬੋਲ ਨਾਲ ਜਿਹੜਾ ਆਇਆ ਫਿਰ ਇੱਕ ਹੈ। ਅੱਛਾ ਜੀ ਪੜਾਂਗੇ ਸਭ ਧਿਆਵੋ ਨਰ, ਨਰ ਜਣੋ ਧਿਆਵੋ ਨਾਰਾਇਣੋ। ਨਾਰਾਇਣੋ ਦਾ ਨਾਰਾਇਣੋ ਜੇ ਆਹ نو ਵਰਗ ਇਹ ਜੋਰ ਦੇ ਦੂਸਰੀ ਜਗ੍ਹਾ ਨਾਰਾਇਣੋ ਦੀ ਡੈਫੀਨੇਸ਼ਨ ਦਿੱਤੀ ਹੈ ਨਾ। ਚਲੋ ਇਹ ਵੀ ਇਹ ਸਕਦੇ ਆ। ਨਾਰਾਇਣ ਜੇ ਚੁੱਕਾ ਜਬ ਜੀ ਜਿਹੜਾ ਕੋਈ ਗੱਲ ਹੋ ਵੀ ਇਹ ਕਹਿਣ ਦਾ ਚੇਤਨ ਕਰਤਾ ਕਿਤੇ ਐ ਨਾਰਾਇਣੋ ਨਾਰਾਇਣੋ ਬੋਲੀ ਜਾਇਓ ਆ ਹਾਂ ਹਾਂ ਉਹ ਨਾਰਾਇਣੋ ਨੂੰ ਧਿਆਉਣਾ ਕੇ ਦੇ ਨਾਲੋਂ ਰਿਸ਼ਤਾ ਤੋੜ ਦੇਣਾ ਝਗੜਾ ਮੁਕਾ ਦੇਣਾ ਹਾਂ ਤੇਰਾ ਵੀ ਰਿਸ਼ਤਾ ਟੁੱਟ ਜੂ ਉਹ ਤਾਂ ਪਹਿਲਾਂ ਤੇ ਹੀ ਹੈ ਤੇਰਾ ਆਪਣੀ ਰਹਿਣ ਤੇ ਧਿਆਨ ਉਹ ਚਲਾ ਗਿਆ ਠੀਕ ਹੈ ਜੀ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ